ਸ਼ਲੋਕ ਮਹਲਾ ਤੀਜਾ ਏ ਮਨ ਹਰਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਏ ਏ ਮਾਨ ਆਪਣੇ ਮਨ ਨੂੰ ਕਹਿੰਦੇ ਨੇ ਤੂੰ ਆਪਜੀ ਵਾਲਾ ਆਪਣੇ ਮੂਲ ਬਲ ਧਿਆਨ ਲੱਕ ਹਰ ਤੇਰੇ ਅੰਦਰ ਹੈ ਉਹਦੇ 'ਤੇ ਧਿਆਨ ਲੱਕ ਬਾਹਰ ਮਾਇਆ 'ਚ ਧਿਆਨ ਨਾ ਲੱਕ ਮਾਇਆ ਦੀ ਭੁੱਖ ਤਾਂ ਆਪਣੇ ਛੱਡਣੀ ਹੈ ਇਕ ਮਨ ਇੱਕ ਚਿੱਤ ਭਾਈ ਇੱਕ ਮਨ ਇੱਕ ਚਿੱਤ ਹੋ ਕੇ ਘਰ ਮਨ ਨੂੰ ਚਿੱਤ ਦੇ ਨਾਲ ਇੱਕੋ ਥਾਂ ਰੱਖ ਨਹੀਂ ਤਾਂ ਫਿਰ ਜੇ ਮਨ ਫਿਰ ਦੂਏ ਪਾਸੇ ਨੂੰ ਚਲੇ ਜਾਂਦਾ ਚਿੱਤ ਵਿਛੜਾ ਖਲਾ ਰਹਿ ਜਾਂਦਾ ਧਿਆਨ ਮਨ ਦਾ ਦੂਰ ਨਾ ਧਿਆਨ ਹੈ ਧਿਆਨ ਦਾ ਦੂਰ ਮਨ ਧਿਆਨ ਕਿ ਤਾ ਰਹਿ ਸਕਦਾ ਇੱਕ ਥਾਂ ਜੇ ਮਨ ਨਾਲ ਰਹੇ ਚਿੱਤ ਦੇ ਉਦੀ ਅਗਿਆਚ ਰਹੇ ਜਿੱਤੇ ਚਿੱਤ ਚਾਹੁੰਦਾ ਹੋਵੇ ਉੱਥੇ ਹੀ ਮੰਨ ਹਰ ਜਿ ਧਿਆਨ ਦਾ ਸਕਦਾ ਬੰਨਾ ਹਰ ਜਿ ਧਿਆਨ ਨਹੀਂ ਦੇ ਸਕਦਾ ਹਰ ਸੰਤਾਂ ਨੂੰ ਕਹਾਂ ਤੁਸੀਂ ਸੋ ਸੰਤੋ ਹਰ ਕੀ ਹੈ ਦੇ ਨਾ ਪਛੋਤਾਏ ਤੈਨੂੰ ਹਰ ਕੀ ਮਿਲ ਜਾਂਦੀ ਆ ਹਰ ਦੇ ਦਿੰਦਾ ਫੇਰ ਨਹੀਂ ਪਛਤਾਇਆ ਜ਼ਿੰਦਗੀ ਇਹਨੂੰ ਆਰਗੂਮੈਂਟ ਆਈ ਨਹੀਂ ਮਿਲਦੀ ਉਹ ਤਾਂ ਹੁੰਦਾ ਜਿਹਨੂੰ ਮਿਲ ਜਾਂਦੀ ਹੈ ਨਾ ਫੇਰ ਨਹੀਂ ਪੁੱਛਦਾ ਇਹ ਜੀਵਨ ਖਬਲਾ ਹੋ ਜਾਂਦਾ ਹਾਂ ਮੈਂ ਤਾਂ ਹਰ ਦੇ ਸਦਾ ਹੀ ਬਲਿਆਲੇ ਜਾਂਦਾ ਜਾ ਰਿਹਾ ਅਗਰ ਪੁਨਿਆਰੇ ਜਾਂਦਾ ਜਿਤ ਸੇਵੀ ਹੈ ਸੁਖ ਪਾਏ ਜੀ ਸੇਵਾ ਚ ਸੁਖੇ ਸੁਖ ਮਿਲਦਾ ਜੀ ਸੇਵਾ ਕਰਕੇ ਮੈਂ ਸੁਖ ਪ੍ਰਾਪਤ ਕੀਤਾ ਹੈ ਨਾਨਕ ਗੁਰਮੁਖ ਮਿਲ ਰਹਿ ਹਮੇ ਸ਼ਬਦ ਆ ਜਿਹੜੀ ਬੇਬੇਕ ਬੁੱਧੀ ਆ ਉਹ ਹਰ ਦੇ ਨਾਲ ਮਿਲੀ ਰਹਿੰਦੀ ਆ ਹਰ ਦੇ ਨਾਲ ਜੁੜੀ ਰਹਿੰਦੀ ਆ ਗੁਰਮਕਾਲ ਨਾਲ ਮਿਲ ਇਕਮਿਕ ਹੋਏ ਰਹਿੰਦੇ ਨੇ ਕਿਉਂਕਿ ਸ਼ਬਦ ਜਿਹੜਾ ਆਪਣਾ ਭਾਣ ਹਮੇ ਸ਼ਬਦ ਹੁੰਦਾ ਆਪਣਾ ਭਾਣ ਠੀਕ ਹੈ ਆਪਣਾ ਬਾਣਾ ਗੁਰੂ ਦੇ ਸ਼ਬਦ ਨਾਲ ਗੁਰ ਨਾਲ ਆਪਣਾ ਭਾਣਾ ਅੰਦਰੋਂ ਤਿਆਗ ਦਿੱਤਾ ਆਕਾ ਤਿਆਗਤਾ ਬਾੜੇ ਦਿੱਤਾ ਆਪਣਾ ਭਾਣਾ ਹਾਂਜੀ ਠੀਕ ਹੈ ਕਿਉਂਕਿ ਸ਼ਬਦ ਤੇ ਸਿਆਰੀ ਲੱਗੀ ਹੈ ਹੋਮੈਰੂਪੀ ਜਿਹੜੀ ਅੰਦਰ ਉਹਨਾਂ ਦੇ ਸੀ ਕੋਈ ਵੀ ਭਾਣਾ ਸੀ ਉਹਨੂੰ ਉਹਨਾਂ ਨੇ ਰਾਖ ਕਰਤਾ ਜਲਦਾ ਗੁਰਬਾਣੀ ਨਾਲ ਜਲਾਤਾ ਉਪਦੇਸ਼ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਜਲਾਤਾ ਠੀਕ ਹੈ ਜੀ ਮਹੱਲਾ 3 ਆਪੇ सेवा ਲਾਇਨ ਆਪੇ ਬਖਸ਼ ਕਰੇ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਆਪੇ ਸੇਵਾ ਲਾਇਨ ਸਾਰੇ ਆਪੇ ਜਿਹੜੇ ਜਿਹੜੇ ਵੀ ਸੇਵਾ ਲੱਗੇ ਨੇ ਉਹ ਹਰ ਨਹੀਂ ਸੇਵਾ ਲਾਇਨੇ ਆਪੇ ਆਪੇ ਬਖਸ਼ ਕਰੇ है ਆਪੇ ਬਖਸ਼ਿਸ਼ ਕਰਦਾ ਸਭਨਾ ਦਾ ਮਾਂ ਸਾਰੇ ਇੱਕੋ ਸਰੂਪ ਹੀ ਹੈ ਸਾਰਿਆਂ ਦੇ ਵਿੱਚ। ਹਮ ਮੰਨ ਦੇ ਲੈਵਲ ਤੇ ਕੋਈ ਡਿਫਰੈਂਸ ਹੈ ਹੈ ਕਿਸੇ ਦਾ। ਆਪੇ ਸਾਰ ਕਰੇ ਆਪੇ ਸਾਰਿਆਂ ਦੀ ਸਾਰ ਕਰਦਾ ਹੋ। ਨਾਨਕ ਨਾਮ ਹੈ ਜੁਗ ਜੁਗ ਸੋਭਾ ਜੇ ਲਾਣੇ ਨਾਮ ਦੇ ਵਿੱਚ ਧਿਆਨ ਰੱਖਿਆ ਹੈ ਧਿਆਨ ਨਿਰੋ ਦਾ ਨਾਮ ਨਾਲ ਧਿਆਨ ਜੁੜ ਗਿਆ ਹਮੇਸ਼ਾ ਦਾ ਨਿਜ ਘਰ ਚ ਵਾਸ ਹੋ ਜਾਂਦਾ ਹੈ ਕਿਉਂਕਿ ਨਾਮ ਨਿਜ ਘਰ ਤੇ ਹੁੰਦਾ ਜਿੱਥੇ ਧਿਆਨ ਲਾਉਂਦਾ ਉੱਥੇ ਜੀਵ ਰਹਿੰਦਾ ਹੈ ਘਰ ਜਿੱਤੇ ਜੇ ਨਾਮ ਹੈ ਉੱਥੇ ਧਿਆਨ ਲਾਉਂੂ ਤਾਂ ਵਿੱਚ ਘਰ ਤੇ ਵਾਸ ਰਹਿੰਦਾ ਹੁੰਦਾ ਹਮੇਸ਼ਾ ਵਾਸ ਤੇ ਹਮੇਸ਼ਾ ਹੀ ਉਹਨਾਂ ਦੀ ਸੋਭਾ ਬਣੀ ਰਹਿੰਦੀ ਹੈ ਜਿੰਨਾ ਚਿਰ ਸੰਸਾਰ ਹੈਗਾ ਠੀਕ ਹੈ ਫਿਰ ਤਾਂ ਉਹਦਾ ਸੱਚਖੰਡ ਵਾਸੀ ਹੋ ਗਿਆ ਨਾ ਜੀ ਨਿਜਕਰਵਾਸ ਹੈ ਹਾਂ ਜੀ ਅੱਥ ਵਾਸੀ ਹੋਏ ਉਹ ਉੱਥੇ ਉੱਥੇ ਮੌਤ ਹੈ ਹੀ ਨਹੀਂ ਠੀਕ ਹੈ ਕਰਤੇ ਮੈਂ ਤੁਜ ਬਿਨ ਅਵਰ ਨਾ ਕੋਈ ਤੁਧ ਆਪੇ ਸ੍ਰਿਸ਼ਟੀ ਸਰਜੀਆ ਆਪੇ ਫਨਗੋਈ ਕਰਤੇ ਨੂੰ ਸਮੋਦਨ ਕਰਕੇ ਹੁਣ ਕਹਿ ਰਹੇ ਨੇ ਇਹ ਕਰਤੇ ਤੂੰ ਕਾਰਨ ਕਾਰਨ ਖੜਾ ਰੱਖਿਆ ਸ੍ਰਿਸ਼ਟੀ ਨੂੰ ਕਰਨ ਵਾਲਾ ਸ੍ਰਿਸ਼ਟੀ ਦਾ ਕਾਰਨ ਤੂੰ ਹੀ ਵੀ ਨਹੀਂ ਜਿਵੇਂ ਧੁੱਪ ਆ ਰਹੀ ਹੈ ਸੂਰਜ ਤੇ ਤਨਾ ਮੈਂ ਤਾਂ ਕੁਝ ਵੀ ਨਹੀਂ ਧੁੱਪ ਦਾ ਕੀ ਹੁੰਦਾ ਧੁੱਪ ਦੀ ਸੂਰਜ ਨਾਲ ਹੁੰਦਾ ਧੁੱਪ ਤੇ ਸੂਰਜ ਨਹੀਂ ਦੇ ਦੋਪਹਿਰ ਤੂੰ ਹੀ ਤੂੰ ਮੈਂ ਤਾਂ ਕੁਝ ਵੀ ਨਹੀਂ ਆਪੇ ਸ੍ਰਿਸ਼ਟੀ ਇਆ ਆਪੇ ਗੁਰ ਗੋਈ ਤੋਂ ਸੇਤੀ ਨੂੰ ਆਵੇ ਪਹਿਲਾਂ ਕਰਨੇ ਆਪੇ ਇਹਨੂੰ ਆਪਣੇ ਚ ਮਿਲ ਜਾਂਦੀਆਂ ਨੇ ਤੇਰੇ ਵਿੱਚੋਂ ਹੀ ਪੈਦਾ ਹੁੰਦਾ ਤੇਰੇ ਚ ਮਿਲ ਜਾਂਦਾ ਠੀਕ ਹੈ ਜੀ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਢਾਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਕੋਈ ਸ਼ਬਦ ਵਰਤਦਾ ਸਾਰਿਆਂ ਜਗ੍ਹਾ ਇੱਕੋ ਹੀ ਹੁਕਮ ਵਰਤਦਾ ਜੋ ਕਰੇ ਸੋ ਜੋ ਕਰਦਾ ਉਹੀ ਹੁੰਦਾ ਹੁਕਮ ਨਾਲੇ ਸਭ ਕੁਝ ਹੋ ਰਿਹਾ ਵਢਾਈ ਗੁਰਮੁਖ ਦੇ ਜੇ ਅੱਜ ਗੁਰਮਖਾਨੇ ਕੀਤੀ ਹੈ ਗੁਰਮਖਾਨੇ ਨੂੰ ਦੇਖ ਫੋਟੋ ਵੀ ਸਮਝਿਆ ਗੁਰਮਖਾਨੇ ਦੀ ਵਢਾਈ ਕੀਤੀ ਹੈ ਵਡਿਆਈ ਕਰਨੀ ਸੁਭਰਤਾ ਗੁਰਬਾਣੀ ਬੜਿਆਈ ਹੋਈ ਹੈ ਗੁਰਬਾਣੀ ਖਤ ਕਹੀ ਹੈ ਬਲਾਈ ਗੁਰਮੁਖਾਂ ਤੋਂ ਠੀਕ ਹੈ ਜੀ ਪ੍ਰਭ ਤੇ ਔਕੜ ਹੈ ਫਿਰ ਇਹਨੂੰ ਪੜਾਂਗੇ ਨੂੰ ਵਡਿਆਈ ਪ੍ਰਭ ਦਿੰਦਾ ਗੁਰਮੁਖ ਸੰਸਾਰ ਨੂੰ ਦਿੰਦੇ ਨੇ ਹਰ ਪਾਵੇ ਸੋਈ ਹਰ ਪਾਉ ਹੈ ਜਿਹਨੂੰ ਦਿੰਦਾ ਪ੍ਰਭ ਠੀਕ ਹੈ ਜੀ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਤਨ ਗੁਰ ਅਰਾਧਿਆ ਗੁਰਮਖਾਣੇ ਪ੍ਰਭ ਆਖੋ ਤੁਹਾਨੂੰ ਤਨ ਤਨ ਗੁਰ ਸੋਈ ਸਾਰੇ ਆਖੋ ਫਤਗੁਰ ਨੂੰ ਤਨ ਤਨ ਤਨ ਜਿਨੇ ਦਿੱਤੀ ਹੈ ਗੁਰਮਖਾਣੇ ਕਾਣੋਂ ਦਾਲੂ ਦਿੱਤੀ ਹੈ ਠੀਕ ਹੈ ਉਹਨਾਂ ਨੇ ਰਾਣਾ ਦਿੱਤੀ ਨਾਮ ਦਿੱਤੀ ਉਹਨਾਂ ਨੂੰ ਦੇ ਜਿੰਨਾ ਕੁ ਡਿਆ ਦਿੱਤੀ ਆ ਗੁਰਮਖਾਨ ਨੂੰ ਠੀਕ ਹੈ ਜੀ ਇਹ ਜਿਹੜਾ ਤਿੰਨ ਵਾਰ ਤਨ ਤਨ ਤਨ ਸ਼ਬਦ ਆਉਂਦਾ ਹੈ ਇਹਦਾ ਕੀ ਭਾਵ ਹੈ ਤਿੰਨੇ ਕੇ ਤਿੰਨੇ ਲੋਕਾਂ ਦੇ ਤਿੰਨ ਲੋਕ ਆਪਾਂ ਕਿਹੜੇ ਹੁਣ ਇੱਕ ਵਾਰ ਫੇਰ ਦੱਸ ਦੋ ਕਿ ਤੇ ਆ ਵਾਰ ਦੀ ਜਿਹੜਾ ਗਲ ਵਿਚ ਨੇ ਉਹ ਵੀ ਜੀਵ ਨੇ ਜਿਹੜੇ ਅਜੀ ਦਿਨਾਂ ਕੋ ਨਹੀਂ ਹੈਗਾ ਜੋ ਉਹ ਵੀ ਹੈਗੇ ਨੇ ਉਹ ਵੀ ਤਾਂ ਅੱਛਾ ਜਿਹੜੇ ਆਪਾਂ ਦਾ ਜਿਹੜੇ ਇੱਥੋਂ ਜਾਂਦੇ ਆ ਉਹਨਾਂ ਦਾ ਕੀ ਹੈ ਜੀ ਜਿਹੜੇ ਅੱਗੇ ਹੰਸ ਅਕੇਲਾ ਠੀਕ ਹੈ ਜੀ ਤੇ ਕਾਲੀ ਵਾਲੇ ਆਪਾਂ ਆਪਾਂ ਆਵਾਂ ਕਾਲੀ ਇੱਥੇ 29ਵੇਂ ਪੌੜੀ ਦੀ ਸਮਾਪਤੀ ਹੈ ਜੀ ਨਾਲੇ ਸਟੋਰਟ ਕੀ ਵਾਰ ਮਹੱਲਾ ਚੌਥਾ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਜੀ